ਪ੍ਰੇਮ ਬੇਪਾਸਾ ਨਾਮ ਲੈ ਇਹ ਸ਼ਾਸਤਰ ਪੁਰਖ ਨਾਮ ਸਗਲ ਸ੍ਰੀ ਪਾਸ ਕੇ ਚੀਨ ਚਿਤ ਮਹਿ ਰਾਗ ਹਾਵੀ ਸਾਵੀ ਯਾਰ ਕੈ ਆਜ ਦੇਸ ਬਖਾਨ ਨਾਮ ਪਾਸ ਕੇ ਹੋਤ ਹੈ ਚੀਨੋ ਪ੍ਰਗਿਆਵਾਨ ਸਾਵੀ ਈਸ ਰਾਵੀ ਈਸ ਪਨ ਆਜ ਦੇ ਨਾਮ ਪਾਸ ਕੇ ਹੋਤ ਹੈ બીਜੋ ਸੋਕ ਸੁਧਾਰ ਜਲ ਸਿੰਧ ਈਸ ਬਖਾਨ ਕੈ ਆਜ ਦੇ ਅੰਕ ਬਖਾਨ ਨਾਮ ਪਾਸ ਕੇ ਹੋਤ ਹੈ ਚਤਰ ਚਿਤ ਮਹਿ ਜਾਨ ਬਿਹਾਥੇ ਆਜ ਸਬਦ ਉਚਰ ਕੈ ਏਸ ਅੰਤ ਸਗਲ ਨਾਮੇ ਪਾਸ ਕੇ ਤੀਨ ਲਿਓ ਮਾਤੀਵੰਤ ਸਿਧ ਆਜ ਸਬਦ ਕੈ ਆਜ ਦੇ ਅੰਤ ਬਖਾਨ ਨਾ ਪਾਸ ਕੇ ਹੋਤ ਸਭ ਤੀਨੋ ਪ੍ਰਗਿਆਵਾਨ ਨੀਰ ਆਜ ਸਬਦ ਉਚਰ ਏਸਰੇ ਅਸਤ੍ਰ ਬਖਾਨ ਨਾ ਪਾਸ ਕੇ ਹੋਤ ਹੈ ਤੀਨ ਲਿਓ ਸੁਰ ਗਿਆਨ ਅਸਿੱਤ ਬਾਰ ਸਬਦ ਆਦ ਕੈ ਪਾਤ ਅਸਤ੍ਰਾਂਤ ਬਖਾਨ ਨਾ ਪਾਸ ਕੇ ਹੋਤ ਹੈ ਤੀਨ ਲਿਓ ਮਾਤੀਵੰਤ ਕਿਸ਼ਨਾ ਆਦਿ ਉਚਾਰ ਕੈ ਆਜ ਦੇ ਬਖਾਨ ਨਾਮ ਪਾਸ ਕੇ ਹੋਤ ਹੈ ਲੀਜੋ ਚਤੁਰਪਛਾਰ ਸ਼ਬਦ ਆਦਿ ਕੈ ਭੀਮਰਾ ਏਸ ਸ਼ਾਸਤਰ ਕਹਿ ਅੰਤ ਨਾਮ ਪਾਸ ਕੇ ਹੋਤ ਹੈ ਚੀਨ ਲਿਓ ਮਤਵੰਤ ਤਪਤੀ ਆਦਿ ਉਚਾਰ ਕੈ ਆਜ ਦੇ ਇਸ ਬਖਾਨ ਨਾਮ ਪਾਸ ਕੇ ਹੋਤੈ ਸੁਜਨ ਸਤ ਕਰ ਜਾਣ ਬਾਹ ਰਾਜ ਸੁਮਨ ਦੇਸ ਭਾਨ ਸਰਤ ਸਰਦ ਪਦ ਭਾਖ ਆਜ ਤੁਨ ਕੈ ਪਾਸ ਕੇ ਚੀਨ ਨਾਮ ਚਿਤਰਾਖ ਬਰਨਬੀਰ ਹਾ ਆਦ ਕੈ ਆਇਦ ਪੁਨ ਪਦ ਦੇਹੋ ਨਾ ਪਾਸ ਕੇ ਓ ਤੈ ਚੀਨ ਚਤਰ ਚਿਤ ਲੇਹੋ ਨਦੀ ਰਾਜ ਸਰਤੀਸ ਪਾਨ ਸਮੁੰਦ ਰਾਟ ਪੁਨ ਭਾਖ ਆਜ ਦੇ ਅੰਤ ਬਖਾਨੀਐ ਨਾ ਪਾਸ 라ਖੀ ਰਾਖ ਬ੍ਰਹਮ ਪੁੱਤਰ ਪਦ ਆਦ ਕੈ ਈਸ ਸ਼ਾਸਤਰ ਕੈ ਅੰਤ ਨਾ ਪਾਸ ਕੇ ਸਕਲੀ ਚੀਨ ਲਿਓ ਮਤਵੰਤ ਬ੍ਰਹਮਾਤ ਬਖਾਨ ਕੈ ਅੰਤ ਪੁੱਤਰ ਪਦ ਦੇਹੋ ਆਜ ਦੇ ਈਸ ਬਖਾਨੀਐ ਨਾ ਪਾਸ ਲਖ ਲੇਹੋ ब्रह्मा आदुचारकै सुत पद बहुर बखान एहि शास्त्र पूर्ण पाखियै नाम पांस पहचान जगत्पिता पद प्रथुम कहै सुत पद अंत बखान नाम पांस के होत है चीनो प्रज्ञावंत कगर आदुचारकै ईश शास्त्र कहै अंत नाम पांस के होत है चीनो प्रज्ञावंत आद सरस्वती उतर कहै ईश शास्त्र अंत नाम पांस के सकल ही चीन लियो मातीवंत ਆ ਮunggu ਆਦ ਬਖਾਨ ਕਹਿ ਈਸ ਸ਼ਾਸਤਰ ਕਹਿ ਅੰਤ ਨਾਮ ਸਗਲ ਫਰੀ ਪਾਂਸ ਕੇ ਨਿਕਸਲ ਚਲਤ ਬੇਅੰਤ ਸਮੁੰਦ ਗਾਵਨੀ ਜੇਰਦੀ ਤਿੰਨ ਕੇ ਨਾਮ ਬਖਾਨ ਈਸ ਸ਼ਾਸਤਰ ਪਉ ਉਚਰੀਐ ਨਾਮ ਪਾਂਸ ਪਹਿਚਾਨ ਸਗਲ ਕਾਲ ਕੇ ਨਾਮ ਲੈ ਆਜਿਤ ਬਹੁਰ ਬਖਾਨ ਨਾਮ ਪਾਂਸ ਕੇ ਹੋਤ ਹੈ ਚੀਨ ਲਿਹੋ ਮਤਵਾਨ ਦੂਧ ਸ਼ਬਦ ਪ੍ਰਥਮ ਹੈ ਉਚਰਨੇਦ ਕਾ ਈਸ ਬਖਾਨ ਆਜਿਤ ਬਹੁਰ ਬਖਾਨੀਐ ਨਾਮ ਪਾਂਸ ਪਹਿਚਾਨ ਬਾਣਿ ਤੇ ਪ੍ਰਥਮ ਬੁਖਾਰ ਕਹਿ ਇਸ ਸ਼ਾਸਤਰ ਕਹਿ ਅੰਤ ਨਾਮ ਸકલ ਸ੍ਰੀ ਪਾਸ ਕੇ ਚੀント ਚਲੈ ਅਨੰਤ ਸਰੂਪ ਜੇ ਆਦ ਵਿਚਾਰ ਕਹਿ ਜਿਦ ਕਹਿ ਇਸ ਬੁਖਾਨ ਆਦਿ ਭਾਕੋ ਪਾਸ ਕੇ ਨਿਕਸਦ ਨਾਮ ਪਰਮਾਨ ਛਿਤ ਜੇ ਜੇ ਆਦ ਬੁਖਾਰ ਕਹਿ ਇਸ ਸ਼ਾਸਤਰ ਕਹਿ ਅੰਤ ਸકલ ਨਾਮ ਸ੍ਰੀ ਪਾਸ ਕੇ ਚੀਨੋ ਪ੍ਰਗਿਆਵੰਤ ਇਸ ਰਣਿ ਆਦ ਬੁਖਾਰ ਕਹਿ ਰਾਜਪਦ ਅੰਤ ਉਚਾਰ ਇਸ ਕਹਿ ਪਾਸ ਕੇ ਲੀਜੀਐ ਨਾਮ ਸੁਧਾਰ ਨਾਰ ਉਚਾਰ ਕੈ ਈਸ ਸ਼ਾਸਤਰ ਪਦ ਹੋ ਨਾਮ ਸਗਲ ਸ੍ਰੀ ਪਾਉਂ ਕੇ ਚੀਨ ਚਤਰ ਹੋ ਚੰਚਲਾਰ ਕੈ ਨਾਮ ਲੈ ਜਾ ਕਹਿ ਨਿਦੈਬ ਖਾਨ ਈਸ ਸ਼ਾਸਤਰ ਪਨ ਉਚਰੀਐ ਨਾਮ ਪਾਉਂਸ ਪਹਿਚਾਨ ਆਹ ਦੇ ਨਾਮਦਾਰੀ ਕੇ ਲੈ ਜਾ ਅੰਤਬਖਾਨ ਨਿਦ ਕਹਿ ਈਸ ਰਿਆਸਤਰ ਕੈ ਨਾਮ ਪਹਿਚਾਨ ਵਰਤਾਤ ਬਖਾਨ ਕਹਿ ਜਾ ਕਹਿ ਨਿਦੈਬ ਖਾਨ ਈਸ ਸ਼ਾਸਤਰ ਪਨ ਭਾਖੀਐ ਨਾਮ ਪਹਿਚਾਨ ਇਸ ਸ੍ਰੀ ਦੇ ਆਦ ਵਿਚਾਰ ਕਹਿ ਨੇ ਕਹਿ ਈਸ ਬਖਾਨ ਈਸ ਸ਼ਾਸਤਰ ਕਹਿ ਭਾਸ ਕੇ ਜਾਨੀਓ ਨਾਮ ਸੁਜਾਨ ਬਰਤਾ ਆਦ ਬਖਾਨ ਕਹਿ ਨਿਦ ਕਹਿ ਈਸ ਬਖਾਨ ਆਜ ਬੌਰ ਬਖਾਨੀਏ ਨਾਮ ਪਾਸ ਪਹਿਚਾਨ ਅੰਜਨਾਰ ਨਾਮ ਲੈ ਜਾ ਕੈ ਨਿਧਾ ਉਚਾਰੇ ਈਸ ਸ਼ਾਸਤਰ ਕਹਿ ਭਾਸ ਕੇ ਲੀਜੋ ਨਾਮ ਸੁਧਾਰ ਬਾਲਾ ਆਦ ਬਖਾਨ ਕਹਿ ਨਿਦ ਕਹਿ ਈਸ ਬਖਾਨ ਨਾਮ ਪਾਸ ਕੇ ਹੋਤ ਹੈ ਚਤੁਰ ਲੀਜੀਓ ਜਾਨ ਅੰਨਾਰ ਕੇ ਨਾਮ ਲੈ ਜਾ ਕਹਿ ਨਿਧ ਬਖਾਨ ਈਸ ਸ਼ਾਸਤਰ ਪਨੂਤਿਏ ਨਾ ਪਾਸ ਪਹਿਚਾਨ ਅਬਰਾ ਆਦਵਚਾਰ ਕਹਿ ਨਿਧ ਖੈ ਈਸ ਬਖਾਨ ਆਜਦ ਬੌਰ ਬਖਾਨੀਏ ਨਾ ਪਾਸ ਪਹਿਚਾਨ ਨਰ ਜਾ ਆਦਵਚਾਰ ਕਹਿ ਜਾ ਨਿਧ ਈਸ ਬਖਾਨ ਆਜਦ ਬੌਰ ਬਖਾਨੀਏ ਨਾ ਪਾਸ ਪਹਿਚਾਨ ਨਰੀਆ ਸ੍ਰੀ ਕਿੰਨਰਨੀ ਸੂਰੀ ਭਾਖ ਜਾ ਭਾਖ ਨਿਧ ਪਤ ਅਸਤਰ ਕਹਿ ਪਾਸ ਕੇ ਨਾਮ ਜੀਨ ਚਿਤਰਾਖ vnd jad achar ka ja ka nidah bkhan ee shastra ka phans ka chino naam sujan avala bala mar ja trija nidah bkhan ee shastra ka phans ka chino naam sujan samundar gamni je nadi tin ke naam bkhan ee shesh ka astr ka naam phans pehchan pae pad pritham bkhan ka ee shastra kahe ant sakal naam shri phans ke nikshud पृथम पाख तडांग पद ईश शास्त्र पुण पाख नाम पाके होतै चीन चतुचित राख पृथम सरोवर शब्द कहै ईश शास्त्र कहै अंत सकल नाम फी पाके चीन लियो मतवंत जल दय आद बखान कहै ईश शास्त्र पद पाख नाम पांसके होतै चीन चतुचित राख मग जाद उचार कहै धार पद बौर बखान ईश शास्त्र कह पांसके लीजो नाम पहचानो आद बार धारो उच्चर कह ईस शास्त्र कह अंत ना पास के होत है चीन लेहो मतवंत कणज तरण पद प्रथुम कह ईस शास्त्र कह अंत सकल नाम श्री भांस के चीन लेहो मतवंत मग जा तार पद प्रथुम कह ईस शास्त्र कह अंत ना पास के होत है चीन लेहो मतवंत अंबद जा तार याद कह ईस शास्त्र कह अंत ना पास के होत है चीन लेहो मतवंत ਅੰਬਦ ਯਾਦ ਹਰਿ ਪ੍ਰਿਥਮ ਕਹਿ ਈਸ ਰਾਸਤਰ ਪਾਚੀਰ ਨਾਮ ਪਾਸ ਕੇ ਹੋਤ ਗਏ ਲੀਜੋ ਜਾਨ ਪ੍ਰਬੀਨ ਬਾਰ ਯਾਦ ਉਚਾਰ ਕੈ ਜਾਨ ਨਿਧ ਅਸਤਰ ਉਚਰ ਸਭ ਪਾਸ ਕੇ ਲੀਜੋ ਨਾਮ ਪਛਾਨ ਪ੍ਰਿਥਮ ਉਚਰ ਪਦ ਨੀਰ ਧਰ ਈਸ ਰਾਸਤਰ ਕਹਿ ਅੰਤ ਸਗਲ ਨਾਮ ਫਰੀ ਪਾਸ ਕੇ ਨਿਕਸ ਚਲੈ ਬਿ ਅੰਤ ਪਦ ਯਾਦ ਬਖਾਨ ਕੈ ਈਸ ਰਾਸਤਰ ਕਹਿ ਦੀਨ ਨਾਮ ਪਾਸ ਕੇ ਹੋਤੈ ਚਤੁਰ ਲੀਜੀਓ ਚੀਨ ਹਰ ਧਰਿਆਦ ਬਖਾਨ ਕਹਿ ਈਸ ਸ਼ਾਸਤਰ ਕਹਿ ਅੰਤ ਸਗਲ ਨਾਮ ਸ੍ਰੀ ਪਾਸ ਕੇ ਨਿਕਸਤ ਚਲਤ ਬੇਅੰਤ ਜਲ ਜਤਰਾਲ ਸਭ ਦੋਚਰ ਕਹਿ ਈਸ ਸ਼ਾਸਤਰ ਕਹਿ ਦੀਨ ਨਾਮ ਪਾਸ ਕੇ ਹੋਤ ਹੈ ਲੀਜੋ ਚੀਨ ਪਰਬੀਨ ਹਰ ਧਰਦ ਜਲ ਧਰਦ 바ਰ ਧਰਦ ਨਿਧ ਅਸਤਰ ਬਖਾਨ ਨਾਮ ਪਾਸ ਕੇ ਹੋਤ ਹੈ ਲੀਜੋ ਚਤੁਰ ਪਛਾਨ ਨੀਰ ਦੇ ਆਦ ਵਿਚਾਰ ਕਹਿ ਈਸ ਸ਼ਾਸਤਰ ਕਹਿ ਅੰਤ ਸਗਲ ਨਾਮ ਸ੍ਰੀ ਪਾਸ ਕੇ ਨਿਕਸਤ ਚਲੈ ਬੇਅੰਤ ਉੰਬਦ ਜਾਧਰ ਨੇ ਦਿ ਉਚਰ ਈਸ਼ ਸ਼ਾਸਤਰ ਕਹ ਅੰਤ ਨਾ ਪਾਸ ਕੇ ਸકલ ਹੀ ਚੀਨ ਨ ਚਤੁਰ ਤਾਰਾ ਧਰਜ ਵਿਚਾਰ ਕਹ ਮਿਤ ਪਤੀ ਇਸ ਬਖਾਨ ਪਛਾਨ ਤਾਰਾ ਤਰ ਕਰਦ ਈਸ ਕੈ ਅਸਤਰ ਬਹੁਰ ਪਦ ਦੀਨ ਨਾ ਪਾਸ ਕੇ ਹੋ ਤੈ ਚਤੁਰ ਲੀ ਦਿਓ ਚੀਨ ਐ ਪਦ ਪ੍ਰਥਮ ਉਚਾਰ ਕਹ ਨਿ ਕੈ ਈਸ ਬਖਾਨ ਉਚਰ ਕਰ ਪਾਸ ਕੇ ਲੀ ਜਾਉ ਨਾਮ ਪਛਾਨ ਸਗਲ ਦੂਦ ਕੇ ਨਾਮ ਲੈ ਨਿਦ ਕਹਿ ਈਸ ਬਖਾਨ ਅਸਤਰ ਉਚਰ ਕੈ ਪਾਸ ਕੇ ਚੀਨ ਨਹੋ ਨਾਮ ਸੁਜਾਨ ਨਾਮ ਸੋ ਵੀਰਨ ਕੇ ਲੀਝੋ ਨਾਮ ਸੁਧਾਰ ਸਗਲ ਬਾੜ ਕੇ ਨਾਮ ਲੈ ਨਿਦ ਅਸਤਰ ਉਚਰ ਕਰ ਕੇ ਨੀਝੋ ਨਾਮ ਸੁਜਾਨ ਸਗਲ ਨਾਮ ਲੈ ਧੂਰ ਕੇ ਧਾਰ ਨਿਦ ਅਸਤਰ ਉਚਰ ਕਰ ਕੇ ਚੀਨੋ ਨਾਮ ਸੁਜਾਨ ਬਾਰਦਿਆਰ ਪਦ ਪ੍ਰਥਮ ਕਹੈ ਈਸ ਰਾਸਤਰ ਕਹੈ ਅੰਤ ਨਿਧ ਕਹੈ ਨਾਮ ਸ੍ਰੀ ਪਾਸਕੇ ਚੀਨਾ ਚਤੁਰ ਅਨੰਤ ਤ੍ਰਾਤਾ ਅੰਤਕ ਪਦ ਪ੍ਰਥਮ ਕਹੈ ਨਿਧ ਏ ਸ਼ਾਸਤਰ ਬਖਾਨ ਨਾਮ ਪਾਸਕੇ ਹੋਤੈ ਚਤੁਰਲੀ ਦੀਓ ਜਾਣ ਜਖੀ ਤ੍ਰਾਨ ਪਦ ਪ੍ਰਥਮ ਕਹੈ ਈਸ ਅੰਤ ਨਾਮ ਸਗਲ ਸ੍ਰੀ ਪਾਸਕੇ ਨਿਕਸਲ ਚਲਤ ਬਿਆੰਤ ਮਤਸਤ੍ਰਾਨ ਪ੍ਰਥਮੈ ਉਚਰੇ ਈਸ ਕੇ ਦੀਨ ਨਾਮ ਪਾਸਕੇ ਹੋਤੈ ਚਤੁਰਲੀ ਦੀਓ ਚੀਨ ਮੈਨ ਕਹਿ ਤ੍ਰਾਣ ਕੈ ਈਸ ਰਾਸਤਰ ਕਹਿ ਦੀਨ ਨਾ ਪਾਸ ਕੇ ਹੋ ਤੈ ਚਤਰਲੀ ਜਿਓ ਚੀਨ ਸਕਲ ਨਾਮ ਲੈ ਨੀਰ ਕੇ ਜਾ ਕਹਿ ਤ੍ਰਾਣ ਬਖਾਨ ਈਸ ਰਾਸਤਰ ਕਹਿ ਪਾਸ ਕੇ ਚੀਨ ਨਾਮ ਅਪਰਮਾਨ ਬਾਹਰ ਤ੍ਰਾਣ ਬਖਾਲ ਕੈ ਈਸ ਰਾਸਤਰ ਕਹਿ ਦੀਨ ਨਾ ਪਾਸ ਕੇ ਹੋ ਤੈ ਚਤਰਲੀ ਜਿਓ ਚੀਨ ਜਲਜ ਪਰ ਪ੍ਰਥਮ ਕਹਿ ਈਸ ਰਾਸਤਰ ਪੁਰਭਾਖ ਨਾਮ ਪਾਸ ਕੇ ਹੋ ਤੈ ਚਤਰਤੀਂ ਚਿਤਰਾਖ ਨੀਰਿ ਜਿਤਰਾਣ ਬਖਾਨ ਕਹੈ ਈਸ ਰਾਸਤਰ ਕਹੈ ਅੰਤ ਸਗਲ ਨਾਮ ਸ੍ਰੀ ਪਾਸ ਕੇ ਨਿਕਸ ਚਲਤ ਅਨੰਤ ਕਮਲ ਤਰਾਣ ਪਦ ਪ੍ਰਥਮ ਕਹੈ ਈਸ ਸ਼ਾਸਤਰ ਕੇ ਦੀਨ ਨਾ ਪਾਸ ਕੇ ਹੋਤੈ ਲੀ ਜਿਓ ਚੀਨ ਰਿਪ ਪਦ ਪ੍ਰਥਮ ਉਚਾਰ ਕਹੈ ਅੰਤਿਕ ਬਖਾਨ ਨਾ ਪਾਸ ਕੇ ਹੋਤੈ ਲੀਜੋ ਸਮ ਸੁਜਾਨ ਸਤਰਿਆ ਸਬਦ ਉਚਰ ਕਹੈ ਅੰਤਿਕ ਪਦ ਦੇਹੋ ਨਾ ਸਗਲ ਸ੍ਰੀ ਪਾਸ ਕੇ ਚੀਨ ਚਤਰ ਚਿਤਲੇ ਹੋ ਆਦ ਖਲੰਗ ਪਦ ਉਤਰ ਕੈ ਅੰਤਿਆਤਕ ਕੇ ਦੀਨ ਨਾ ਪਾਸ ਕੇ ਹੋਤੈ ਚਤੁਰਲੀ ਦੀਉ ਚੀਨ ਸਬਦ ਉਤਰ ਕੈ ਅੰਤਿਆਤਕ ਕਹਿ ਭਾਕ ਨਾਮ ਪਾਸ ਕੇ ਹੋਤੈ ਸ੍ਰੀ ਭਾਕ ਕੇ ਚੀਨ ਚਤੁਰਚਿਤ ਤਨ ਰਿਪ ਪ੍ਰਿਥਵਖਾਰ ਕੈ ਅੰਤਿਆਤਕ ਕੇ ਬੀਨ ਨਾ ਪਾਸ ਕੇ ਹੋਤੈ ਚਤੁਰਲੀ ਜੀਉ ਚੀਨ ਅਸ ਆਰੀਆਤ ਬਖਾਨ ਕੈ ਅੰਤਿਆਤਕ ਕਹੋ ਭਾਕ ਨਾਮ ਪਾਸ ਕੇ ਹੋਤ ਚੀਨ ਚਤੁਰਚਿਤ ਦਲਹਾ ਪ੍ਰਥਮ ਕਹੈ ਅੰਤਿਆਤਿਕ ਕੋ ਦੇਹੋ ਨਾ ਪਾਸ ਕੇ ਹੋਤੈ ਚੀਨ ਚਤਰ ਚਿਤਲੇ ਹੋ ਪ੍ਰਤਨਾਤਿਕ ਪਦ ਪ੍ਰਥਮ ਕਹੈ ਅੰਤਿਆਤਿਕ ਕੇ ਦੀਨ ਨਾ ਪਾਸ ਕੇ ਹੋਤੈ ਚਤਰ ਲੀਜੋ ਚੀਨ ਤੁਜਨੀ ਅਰ ਪਦ ਪ੍ਰਥਮ ਕਹੈ ਅੰਤਿਆਤਿਕ ਕਹੈ ਉਜਾਰੈ ਨਾ ਪਾਸ ਕੇ ਹੋਤੈ ਲੀਜੋ ਸੁਧਾਰ ਆਦ ਬਾਹਨੀ ਸ਼ਬਦ ਕਹੈ ਰੇ ਪਿਆਰੇ ਸ਼ਬਦ ਬਖਾਨ ਨਾ ਪਾਸ ਕੇ ਹੋਤ ਹੈ ਚੀਨ ਮਾਂਹਨੀ ਆਦ ਬਖਾਨ ਕਹਿ ਰੇ ਪਿਆਰੀ ਬਹਰ ਬਖਾਨ ਨਾ ਪਾਸ ਕੇ ਹੋ ਤੈ ਚੀਨ ਲਿਓ ਬੋ ਦੀਵਾਨ ਸਹਿਨਾ ਆਦ ਉਚਾਰ ਕਹਿ ਰੇ ਪਿਆਰੀ ਬਹਰ ਬਖਾਨ ਨਾ ਪਾਸ ਕੇ ਹੋ ਤੈ ਲੀਜੋ ਚਤਰ ਪਛਾਨ ਹੈ ਨੀ ਆਦ ਕਹਿ ਅੰਤ ਅੰਤਿਕ ਕੇ ਦੀਨ ਨਾ ਪਾਸ ਕੇ ਹੋ ਤੈ ਚਤਰ ਲੀਜੀ ਚੀਨ ਗੈ ਨੀ ਆਦ ਕਹਿ ਅੰਤ ਅੰਤਿਕ ਅਰ ਦੇ ਹੋ ਨਾ ਪਾਸ ਕੇ ਹੋ ਤੈ ਚੀਨ ਚਤਰ ਚਿਦ ਲੀਹੋ ਪਤਨੀ ਆਦਮਖਾਨ ਕਹਿ ਆਰਿ ਪਦ ਬਹੁ ਰੂਚਾਰ ਨਾ ਪਾਸ ਕੇ ਹੋ ਤੈ ਜਾਨ ਲਿਹੋ ਨਿਰਘਾਰ ਰਤਨੀ ਆਦਮਖਾਨ ਕਹਿ ਰੇ ਪਿਆਰੀ ਅੰਤੂਚਾਰ ਨਾ ਪਾਸ ਕੇ ਹੋ ਤੈ ਲੀਜੋ ਸੋ ਕਭ ਸੁਧਾਰ ਨਿਰਪਣੀ ਆਦਮਖਾਨ ਕਹਿ ਰੇ ਪਖਿਪ ਬਹੁ ਰੂਚਾਰ ਨਾ ਪਾਸ ਹੋ ਤੈ ਲੀਜੋ ਸੋ ਕਭ ਸੁਧਾਰ ਪਟਨੀ ਆਦਮਖਾਨ ਕਹਿ ਰੇ ਪਿਆਰੀ ਬੋਰ ਬਖਾਨ ਨਾ ਪਾਸ ਕੇ ਹੋ ਤੈ ਚੀਨੋ ਪ੍ਰਗਿਆਵਾਰ ਔਰ ਵੀਰਣੀ ਸਬਦ ਕਹਿ ਰੇ ਪਿਆਰੇ ਬਹੁਰ ਬਖਾਨ ਨਾ ਪਾਸ ਕੇ ਹੋ ਤੈ ਚੀਨ ਲਿਓ ਮਾਤੀਵਾਨ ਸ਼ਤਰਣੀ ਆਗ ਬਖਾਰ ਕਹਿ ਰੇ ਪਿਆਰੇ ਤੁਨ ਪਦ ਦੇ ਹੋ ਨਾ ਕੇ ਹੋ ਤੈ ਚੀਨ ਚਤੁਰਚਿਤ ਲੇਹੋ ਜੁਧ ਰਿਆਗ ਬਖਾਰ ਕਹਿ ਪੁਨ ਰੇ ਪਿਆਰ ਕੇ ਦੀਨ ਨਾ ਪਾਸ ਕੇ ਹੋ ਤੈ ਚਤੁਰਲੀ ਰਿਪਣੀ ਆਦ ਉਚਾਰ ਕਹਿ ਰੇ ਭਖੇ ਭੰਤ ਬਖਾਨ ਨਾਮ ਪਾਸ ਕੇ ਹੋ ਤੈ ਚਤਰਚਿਤ ਪਹਿਚਾਨ अरणि आदुचार विचार कह रे पिय बौर बखान नाम पास के होत है चीन ले हो मतवान राजनि याद विचार कह रे पिय रे अंत बखान नाम पास के होत है चीन लेओ बुद्धवान आदि श्रणि शब्द कह रे पिय रे बखान नाम पास के होत है चीन लेओ मतवान भूपण बखान कह रे पिय अंत चार नाम पास के होत है चीनो चत्रो ਨਿਰਪਜਨ ਏ ਸ੍ਰੀਣੀ ਆਦ ਕਹੋ ਰੇ ਪਿਆਰੇ ਅੰਤੂਚਾਰ ਨਾ ਪਾਸ ਕੇ ਹੋਤ ਹੈ ਲੀਜੋ ਸੋ ਕਭ ਸੁਧਾਰ ਰਾਜਨ ਆਦ ਬਖਾਨ ਕਹਿ ਰੇ ਪਿਆਰਿਆੰ ਤੂਚਾਰ ਨਾ ਪਾਸ ਕੇ ਹੋਤ ਹੈ ਜੀਨੋ ਚਦਰ ਅਪਾਰ ਏ ਸੁਨਿਆਦ ਬਖਾਨ ਕਹਿ ਹੰਤ ਗਭੌਰ ਉਚਾਰ ਨਾ ਪਾਸ ਕੇ ਹੋਤ ਹੈ ਲੀਜੋ ਸੋ ਸੁਧਾਰ ਪ੍ਰਥਮ ਨਰੇਸ਼ਣ ਸ਼ਬਦ ਕਹਿ ਰੇ ਪਿਆਰੇ ਅੰਤੂਚਾਰ ਨਾ ਪਾਸ ਕੇ ਹੋਤ ਹੈ ਲੀਜੋ ਸੋ ਕਭ ਸੁਧਾਰ ਆਦਰ ਆਵਨੀ ਸਬਦ ਕਹਿ ਰੇ ਪੈ ਰਿਆ ਤੁਚਾਰ ਨਾ ਪਾਸ ਕੇ ਹੋਤ ਹੈ ਲੀਜੋ ਸੋ ਕਬ ਸੁਧਾਰ ਆਦ ਉਚਾਰ ਕਹਿ ਰੇ ਪੈ ਆਰੀ ਬਹੁਰ ਬਖਾਨ ਨਾ ਪਾਸ ਕੇ ਹੋਤ ਹੈ ਸਮਝੋ ਸੁਗਰ ਸੁਜਾਨ ਈਸਰਣੀ ਆਦ ਬਖਾਰ ਕਹਿ ਰੇ ਪਿਆਰੀ ਉਚਰ ਨਾ ਪਾਸ ਕੇ ਹੋਤ ਹੈ ਚੀਨੋ ਤੁਜਨੀ ਆਦ ਬਖਾਰ ਕਹਿ ਰੇ ਪਿਆਰੀ ਅੰਤੂਚਾਰ ਨਾ ਹੋਤ ਹੈ ਚੀਨੋ ਚਤਰ दै तन याद बुखार कै रे प्यार उच्चर नाम अंत पास के होत है चीनो सो कब सुधार रदनी याद बुखार कै रे प्यार उच्चर हो अंत ना पास के होत है चीनो चतुर्व्यंत प्रथम पद उच्चरो बारणी रे प्यार अंत उच्चार पास के होत है नीजो सो सुधार